ਸ਼ਲੋਕ ਮਹਲਾ 5ਵਾਂ ਨਦੀ ਤਰੰਦੜੀ ਮੈਂਡਾ ਖੋਜਨਾ ਖੁੰਬੈ ਮੰਜ ਮੁਹੱਬਤ ਤੇਰੀ ਤੋਂ ਸੈ ਚਰਣੀ ਮੈਂਡਾ ਜਿਹੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਅਦਵੈ ਨਦੀ ਦੇ ਉੱਤੇ ਵੀ ਚੱਲੀ ਇਹੜੀ ਨਦੀ ਪਾਰ ਕੀਤੀ ਜਾਣਾ ਤੇਰੇ ਪਿੱਛੇ ਲੱਗ ਥੱਲੇ ਨੂੰ ਗਿਆ ਬਾਰੇ ਦੀ ਖੋਜ ਹੈ ਮੈਂ ਤਾਂ ਖੋਜ ਲਈ ਖੋਜ ਤਾਂ ਹੈ ਅਸਲ ਫਿਰ ਥੱਲੇ ਹੀ ਗਿਆ ਨਦੀ ਦੇ ਉੱਤੇ ਦੀਆਂ ਉਹਨਾਂ ਦੀਆਂ ਕਹਾਣੀਆਂ ਬਣਾਈ ਸ਼ਬਦ ਗੁਰੂ ਦੇ ਪਿੱਛੇ ਚੱਲੇ ਗੁਰਬਾਣੀ ਦੇ ਪਿੱਛੇ ਚੱਲੇ ਤਾਂ ਮਾਇਆ ਗਈ ਹੋਈ ਭਾਜ ਤੇ ਆਂ ਜੱਗ ਜੜੀ ਆਮ ਤੋਂ ਬਿਨਾ ਹੋਰ ਕੋ ਚੱਲ ਲੱਗਦੀ ਦੀ ਮੇਰਾ ਖੋਜ ਉਹ ਮੈਂ ਵਸਤਾ ਉਚਾਰ ਰਹਿੰਦਾ ਇਹ ਤਾਂ ਅੱਗ ਦੀ ਨਦੀ ਕਰ ਰਿਹਾ ਤਾਂ ਐਸਾ ਰਹਿੰਦਾ ਐਸਾ ਉਚਾਰ ਰੱਖਦਾ ਸੇ ਮਾਇਆ ਨੂੰ ਮੇਰਾ ਖੋਜ ਨਾ ਕੁੰਭਾ ਠੀਕ ਹੈ ਜੀ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤੇਰੀ ਕੰਮਰੇ ਅੰਦਰ ਤੇਰੀ ਮੁਹੱਬਤ ਤੇਰੀ ਮੁਹੱਬਤ ਨਾ ਤੇਰੀ ਮੁੱਕੇ ਹੱਦ ਤੇਰੀ ਹੈ ਧਿਆਨ ਤਾਂ ਤੇਰੇ ਦਾ ਜਾਂਦੀ ਤੇਰੇ ਪਿੱਛੇ ਚੱਲ ਗਈ ਪੰਜ ਤੇਰੀ ਉਡੀ ਠੀਕ ਹੈ ਤੋਂ ਸੈ ਚਰਣੀ ਮੈਂਡਾ ਸੀਤਮ ਹਰ ਨਾਨਕ ਤੁਲਹਾ 베ੜੀ ਤੇਰੇ ਜਨਨ ਕਰਕੇ ਤਾਂ ਮੇਰਾ ਹਿਰਦ ਸੀਤਲ ਠੱਗਾ ਇਹ ਤਾਂ ਹੀ ਤਾਂ ਅਗਰ ਤਰਗੀਬ ਤਾਂ ਹੀ ਦਾ ਸੀਤਮ ਸੀਤਲ ਹਰ ਨਾਨਕ ਤੁਲਹਾ 베ੜੀ ਏ ਹਰ ਨਾਨਕ ਕਹਿੰਦਾ ਹਰ ਹੀ ਤੁਲਹਾ 베ੜੀ ਯਸਤੇ ਆਦੀ ਪਰ ਖੁਦਾ ਹਰ ਤੁਲਾ ਆਪੇ ਬੀੜੀਏ ਉਹ ਹਰ ਮੋਢਿਆਂ ਤੇ ਚੱਕ ਕੇ ਰਗਾ ਤਾਂ ਗੱਲ ਆ ਹੈ ਬਹਿਰ ਕਿਥੋਂ ਖੁਦਾ ਜਾਗ ਚੱਕਿਆ ਕੰਨੇ ਲਿਆ ਹਰ ਤੱਕ ਖੁਦਾ ਲੈ ਕੇ ਉਹਦਾ ਜਾਂ ਫਾਂ ਹੋਇਆ ਮਾਇੂ ਕੁਬੜਾ ਕਥਲ ਕੀ ਤੇਗ ਗੱਲ ਵਿੱਚ ਆਏ ਕਹਾਣੀ 크੍ਰਿਸਚਨ ਸੁਣਾਉਂਦੇ ਆ ਜੀ ਅੱਛਾ ਜੀ ਮੈਂ ਦੇਖਿਆ ਆਪਣੀ ਸੁਰਤ ਨਾਲ ਕਿ ਜਿੱਥੇ ਤਾਂ ਮੈਂ ਸੌਖਾ ਸੀ ਉੱਥੇ ਤਾਂ ਸੀਗੀਆਂ ਚਾਰ ਪੈੜਾਂ ਅੱਛਾ ਜਦ ਮੈਂ ਦੁੱਖ ਚ ਆਇਆ ਮੈਂ ਦੇਖਿਆ ਉੱਥੇ ਸਿਰਫ ਦੋਏ ਪੈੜਾਂ ਸੀ ਅੱਛਾ ਫਿਰ ਉਹਨੂੰ ਇਹ ਗਿਆਨ ਹੋਇਆ ਵੀ ਜਦੋਂ ਤੇਰਾ ਸੁਖ ਦਾ ਸਮਾਂ ਸੀ ਉਸ ਸਮੇਂ ਤਾਂ ਤੇਰੇ ਨਾਲ ਸੀਗਾ ਤੇਰਾ ਪ੍ਰੀਤਮ ਜਦੋਂ ਦੁੱਖ ਦਾ ਸਮਾਂ ਆਇਆ ਮਨ ਦੀ ਉਹ ਗੱਲ ਹੈ ਨਾ ਫਿਰ ਮਨ ਜਿਵੇਂ ਆਪਾਂ ਕਹਿ ਰਹੇ ਹਾਂ ਉਹਨੂੰ ਫਿਰ ਉਹਨੇ ਗੋਦੀ ਚੱਕ ਲਈ ਪੈੜਾ ਰਹਿ ਗਈਆਂ ਠੀਕ ਹੈ ਪਰ ਉਹ ਜਿਹੜਾ ਆਮ ਬੰਦੇ ਆ ਆਮ ਬੰਦੇ ਦੀ ਕਹਾਣੀ ਵਧੀਆ ਹਾਂਜੀ ਠੀਕ ਹੈ ਜੀ ਮਹੱਲਾ ਪੰਜਵਾਂ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੇ ਮਿੱਤਰ ਸਾੜੜੇ ਸਈ ਜਗ ਸਭਾਇਆ ਜਨ ਨਾਨਕ ਵਿਰਲੇ ਕਰਨ ਸਾਡੇ ਬਿੱਤਲ ਕੋਈ ਤਾਂ ਸਾਡੇ ਸੱਜਣ ਨੇ ਹਾਂ ਟੁੰਡੇ ਦੀ ਜਗ ਸਬਾਇਆ ਜਨ ਵਿਰਲੇ ਹੋੜਣ ਨਹੀਂ ਜਲਦ ਸੁਭਾਇਆ ਚਰਨਾਂ ਦੇ ਕਵੇਲੇ ਕਹੀ ਐਸੇ ਸਜਣ ਤਬ ਢੋਲਦੀ ਫਿਰਦੀ ਏ ਸਾਰੇ ਸੰਸਾਰ ਚ ਐਈ ਤਬਣਦੇ ਦੀ ਕਾਹਦੇ ਕਦੇ ਬੱਲੇ ਬੱਲੇ ਦੇ ਬੱਲੇ ਨੱਪਲੇ ਸਤ ਗੋਤੋਖੇ ਠੀਕ ਹੈ ਜੀ ਹੈਗੇ ਨੇ ਹਰ ਦਾ ਜਿੱਥੇ ਢੋਲ ਪੈਦਾ ਹੋਵੇ ਜਾਣਾ ਪੈਂਦਾ ਦੇਖਣਾ ਪੈਂਦਾ ਬੱਲੇ ਦੇ ਉਹ ਜਿਹੜੇ ਬੱਲੇ ਨਾਲ ਉਹਨਾਂ ਦਾ ਢੋਲ ਕੋਈ ਨਹੀਂ ਪੈਦਾ ਉਹਾਂ ਦੇ ਬੋਰਡ ਕੋਈ ਨਹੀਂ ਲੱਗਿਆ ਹੋਇਆ। ਉਹਾਂ ਦੀ ਹੈਡ ਕੋਈ ਨਹੀਂ ਹੈ। ਇਹ ਪ੍ਰੋਬਲਮ ਹੋਦੀ ਆ। ਉਹ ਬੱਲੇ ਲੱਭਣੇ ਔਖੇ ਨੇ। ਬੱਬੇ ਬਕਾਲੇ ਤਾਂ ਸਿਰਫ ਕਹਿੰਦੇ ਕਿੰਨੀਆਂ ਲੱਗੀਆਂ ਹੋਣੀ ਸੀ। ਥੋੜੀ ਸੀ ਨਾ। ਕਿਉਂਕਿ ਹੁਣ ਤਾਂ ਫੇਰ 22000 ਹੋਣਗੀਆਂ ਮੰਜ਼ੀਆਂ ਜੀ। ਲੋਕ ਜੇ ਆਉਂਦਾ ਥੱਲੇ ਥੱਲੇ ਤੇ 22 22 ਨੇ ਚਿੰਨ ਭਾਈਆ ਨੂੰ ਸਹੀ ਅਸਲਾਗੇ ਤੇ ਸਹੀ ਮਹਗੁਰੂ ਤੱਕ ਬੋਲਦੇ ਰੇ ਤੇ ਇਹ ਪੰਕਤੀ ਦਾ ਕੀ ਕਰਾਂਗੇ ਆਪਾਂ ਹੌ ਟੁੰਡੇਂਦੀ ਜਗ ਸਬਾਇਆ ਨਾਨਕ ਵਿਰਲੇ ਕਈ ਜਿਆਦਾ ਹੈਗੇ ਨਾ ਕਈ ਜੀ ਰਹਿ ਰਹੇ ਨੇ ਬੱਲੇ ਤਾਂ ਵੀ ਥੋੜਿਆ ਕੁ ਹੁੰਦੀ ਉਹਦੀ ਠੀਕ ਵੀ ਜਿਹਨੂੰ ਲੋਡ ਹੁੰਦੀ ਆ ਲੱਗ ਵੀ ਲੈਂਦਾ ਉਹਦਾ ਮੇਲ ਵੀ ਕਰ ਦਿੰਦਾ ਜਿਹਦੇ ਅੰਦਰ ਇੱਛਾ ਹੋਦੀ ਉਹ ਤਾਂ ਮੇਲ ਨਹੀਂ ਕਰ ਸਕਦਾ ਨਹੀਂ ਵੀ ਹੋ ਜਾਂਦਾ ਪੌੜੀ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਡਿੱਠਿਆਂ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਡਿੱਠਿਆਂ ਜਦੋਂ ਤੇਰੇ ਭਗਤਾਂ ਦੇ ਦਰਸ਼ਨ ਹੁੰਦੇ ਨੇ ਤਾਂ ਪਰਮੇਸ਼ਰ ਦੀ ਯਾਦ ਆ ਜਾਂਦੀ ਹੈ ਤੇਰੀ ਯਾਦ ਆਉਂਦੀ ਹੈ ਸਾਹਿਬ ਦੀ ਯਾਦ ਆਉਂਦੀ ਹੈ ਕੰਤਾਂ ਦੇ ਦਰਸ਼ਨ ਨੂੰ ਤਾਂ ਸਾਹਿਬ ਦੀ ਯਾਦ ਆ ਜਾਂਦੀ ਉਹ ਟਿੱਗਿਆ ਹੋਇਆ ਚਿਹਰੇ ਵਾਲੇ ਕੇ ਸੁਪਰੇਸ਼ਨ ਦੀ ਮੈਲ ਸਾਧ ਸੰਗੀ ਬੁੱਠਿਆਂ ਐਸੇ ਕਿਸੇ ਕੋਲ ਬੁੱਝ ਕੋਲ ਬਹਿ ਜਾਈਏ ਗੱਲਬਾਤ ਕਰੀਏ ਜੇ ਕੋਈ ਕਿਰਪਾ ਕਰਕੇ ਕੋਈ ਗੱਲਬਾਤ ਸੁਣਾ ਦੇ ਗਿਆਨ ਦੀ ਉਸ ਦੀ ਮਨ ਕੱਟੀ ਜਾਂਦੀ ਠੀਕ ਹੈ ਜੋ ਕਿੰਨੋ ਕੀਦੇ ਸੋ ਲਾਭ ਲਾਭ ਜਿਵੇਂ ਜਨਮ ਮਰਨ ਭੋ ਸ਼ਬਦ ਜਪ ਬੰਧਨ ਖੋਲਣ ਸੰਤ ਤੂਤ ਸਭ ਜਾਹੇ ਛਪ ਕਰਮਾਂ ਵਾਲਾ ਭੋ ਹੈ ਜਨ ਕਾ ਸ਼ਬਦ ਜਪ ਜਨੂ ਮਲ ਦਾ ਇਹ ਭੌਰ ਡਰਨ ਹੀ ਜਾਂਦਾ ਡਰੇ ਹੈ ਵੈਸੇ ਜਲ ਪਾਣ ਡਰੇ ਡਰ ਅੱਛਾ ਕਟੀਏ ਜਨ ਕਾ ਸ਼ਬਦ ਜਪ ਜਿਹੜਾ ਗਿਆਨ ਹੈ ਨਾ ਹਰ ਕਾਲ ਜਾਂ ਜੋਨਾ ਉਪਦੇਸ਼ ਦਿੱਤਾ ਇਹਨੂੰ ਜੇ ਜਪ ਲਈਏ ਦੇਖੋ ਜਪ ਹੋਣਾ ਸ਼ਬਦਾਂ ਨਾਲ ਜਪ ਆਇਆ ਹੋਇਆ ਹੈ ਲਫ਼ਜ਼ ਜੋ ਗੁਰਬਾਣੀ ਹੈ ਇਹਨੂੰ ਜੇ ਸੁਬਜ ਲਈਏ ਜਲਮਰ ਦਾ ਜਾਂਦਾ ਸੁਧਾਰ ਫਿਰ ਬਣਦਾ ਜਿੜਕੀ ਵਾਲੀ ਲੋਕ ਜਾਨ ਉਹਦਾ ਸ਼ਬਦ ਹੈ ਉਹਦਾ ਹੀ ਉਪਦੇਸ਼ ਹੈ ਸ਼ਬਦ ਕਿਨੇ ਰੋਕ ਨਹੀਂ ਰਿਹਾ ਜੀ ਪਾਜੀ ਬੀ ਨੇ ਲਿਖਿਆ ਚਾਹੇ ਚੌਥੇ 'ਚ ਲਿਖਿਆ ਚਾਹੇ ਦੂਜਾ ਹੈ ਤਾਂ ਨਾਨਕ ਸਲਾਮਾਨ ਦਾ ਖੋਲਣ ਸੰਤ ਜਿਹੜੇ ਬੰਦਨ ਨੇ ਨਾ ਹਾਂਜੀ ਹੋਏ ਉਹਨਾਂ ਕਹਦੇ ਨੇ ਨਾਨਕ ਔਗਣ ਜਿੱਤ ਤੇ ਤੇ ਗੜੀ ਬੜਾ ਅਗੜ ਮੇਰਾ ਹੀ ਬੰਦਲ ਇਹ ਖੋਲ ਲੈਂਦੇ ਨੇ ਸੰਤ ਜੀ ਉਹਦਾ ਤੇ ਸ਼ਹਾਦਤ ਦੇ ਦੂਵੀ ਦੇ ਦੂਤ ਸਭ ਜਾਹੇ ਛੱਪ ਮੈਂ ਤਾਂ ਅਜ ਬਣਾ ਨੇ ਅਜਬ ਕੇ ਦੂਤ ਜਿਹੜੇ ਉਲਟਾ ਪ੍ਰਚਾਰ ਕਰਨ ਵਾਲੇ ਨੇ ਇਹ ਦੂਤ ਦਾ ਪ੍ਰਚਾਰ ਹੈ ਹੁਣ ਕਹੀਂ ਜਾਵ ਦੂਤਾਂ ਦਾ ਪ੍ਰਚਾਰ ਬੜੇ ਜੋਰ-ਸ਼ੋਰ ਨਾਲ ਹੋਇਆ ਹੋ ਵੀ ਰਿਹਾ ਪਰ ਹੁਣ ਦਬ ਗਿਆ ਕਿ ਸੰਤ ਸਾਰੇ ਜੱਗ ਦੇ ਦੂਤ ਤੇ ਗੁਰਬਾਣੀ ਤੋਂ ਹੌਲਦ ਪ੍ਰਚਾਰ ਹੁਣ ਸਾਰੇ ਝੱਬ ਜਾਣਗੇ ਵਕਿਆਂ ਦੇ ਵਚਨ ਦੇ ਪ੍ਰਚਾਰ ਤੋਂ ਲੋਕਾਂ ਜਿਵੇਂ ਤਾਰੇ ਛੱਪ ਜਾਂਦੇ ਨੇ ਸੂਰਜ ਚੜ੍ਹੇ ਤੇ ਦਿਹੇ ਨੇ ਤੇ ਦਿਖਣਾ ਹੀ ਨਹੀਂ ਸਾ ਤੂੰ ਹੀ ਨਾ ਪੰਜਾਬ ਵਿੱਚ ਕਿਤੇ ਹਾਂਜੀ ਮੈਂ ਉਪਰ ਹੀ ਕਿਹਾ ਸੀਗਾ ਜਿਹਨਾਂ ਦੇ ਘਰ 'ਚ ਉਹਤੇ ਬੈਠੇ ਸੀ ਉਹਨਾਂ ਦੇ ਘਰ ਨੇ ਕੇ ਬੈਠੇ ਹੁੰਦੇ ਸੀ ਕੁਪੜੇ ਥੰਡੇ ਉਹਨਾਂ ਲੋਕ ਕਾਫੀ ਤੇ ਬੈਠੀ ਜਾਣ ਅਪੜ ਤੰਬਲੇ ਕੇ ਇਹਦੇ ਥੰਡੇ ਹੋ ਉਹ ਕਾਫੀ ਇੱਕ ਉਹਨਾਂ ਚ ਦੋਤੀ ਪਾਈ ਹੋਈ ਸੀ ਮੈਨੂੰ ਨਹੀਂ ਸੀ ਖਿਆਲ ਉਹਨੇ ਜਾਣਦਾ ਪਹਿਲਾਂ ਦੇਖਿਆ ਲ ਸੀ ਉਹ ਕਹਿੰਦੇ ਆਓ ਜੀ ਭਗਤੀ ਉਹ ਨੂੰ ਕਹਿੰਦੇ ਤੇਰੇ ਚਾਰ ਜਾਨ ਇਕੱਠੇ ਉਹ ਹੱਥ ਜੋੜ ਕੇ ਖੜਾ ਹੋ ਗਿਆ ਵਜਾਰ ਕਰ ਰhesi ਵਜਾਰ ਕਹਿੰਦੇ ਕਿਹਾ ਵਾਤਾ ਭਗਤੀ ਕੈਸੇ ਹੋ ਗਏ ਗਾੜੀ ਕਿਉਂ ਹੋ ਗਏ ਰਾਜ ਕਿਉਂ ਹੋ ਗਏ ਕਹਾ ਭਈਆ ਚਾਰ ਜੂਤੇ ਮਾਲ ਲਓ 10 ਗਾੜੀ ਦੇ ਲਓ ਪਰ ਭਗਤੀ ਬਤ ਕਹੋ ਇਹ ਤਾਂ ਸੰਤ ਐ ਕਿਆ ਗੱਲ ਕੇ ਦਾ ਛਿੱਤਰ ਮਾਰ ਲਓ ਸੰਤ ਨਾਲ ਉਹ ਸਾਨੂੰ ਠੀਕ ਹੈ ਜੀ ਸਾਡੀ ਜੀ ਇੰਨਾ ਬਦਰਾਮ ਹੋ ਚੁੱਕਾ ਸ਼ਬਦ ਹੈ ਯੂਪੀ ਦੇ ਵਿੱਚ ਇਹ ਸੰਤੋਂ ਜ਼ਿਆਦਾ ਬਦਰਾਮ ਹੋ ਚੁੱਕਾ ਸ਼ਬਦ ਤੁਸੀਂ ਦੇਖਿਓ 2-4 ਸਾਲ ਨੂੰ ਇਹ ਕਿਆ ਗੱਲ ਕਿ ਗਾਣਾ ਦੱਸ ਕਰ ਲਓ ਜਿਵੇਂ ਉਹ ਫੌਜੀ ਕਿਹਨੂੰ ਕਹਿ ਦੀ ਬਥੇਰਦਾ ਹਾਲਾਂਕਿ ਫੌਜ ਕਿੱਦਾਂ ਫੌਜੀ ਚੱਕ ਰੱਛਾ ਕਰਦਾ ਆਪਣੀ ਜਾਨਵਰ ਦੱਦੇ ਵਾਸਤੇ ਦੇ ਟੈਨਪਲੇਟ ਚਾਕੇ ਪਬਲਿਕ ਦੇ ਵਿੱਚ ਨਰਦਾ ਦੀ ਪਬਲਿਕ ਲਾਈਫ ਦੀ ਹਾਂਜੀ ਤਿਸ ਸਿਓ ਲਾਈਨ ਰੰਗ ਜਿਸ ਦੀ ਉੱਚੀ ਹੋਂ ਉੱਚਾ ਥਾਨ ਅਗਮਪਾਰੀਆਂ ਕਿ ਜਿਸਿਆਂ ਲਾਈਨ ਰੰਗ ਜਿਸ ਕੀ ਸਭ ਧਾਰੀ ਹੈ ਰੰਗ ਕੀ ਦਾ ਲਾਉਣਾ ਰੰਗ ਕੀ ਲਾਉਣਾ ਤਿਸ ਤੂ ਨੇ ਹੋ ਭਗਤ ਜਿਹੜੇ ਸੰਤ ਬੰਧਨ ਤੋੜਦੇ ਨੇ ਰੰਗ ਕਿਹਦੇ ਨਾਲ ਜੋੜਦੇ ਕਿਹਦੇ ਨਾਲ ਨੇ ਜਿਸ ਕੀ ਸਭ ਧਾਰੀ ਹੈ ਜਿਹਨੇ ਸਾਰੀ ਢਾੜ ਕੀਤੀ ਹੋਈ ਹੈ ਨਾਮ ਨਾਲ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਘੜ ਪ੍ਰੇਮਦ ਇਹਨੇ ਸਾਰੀ ਸਿਸਟਮ ਆਸਰਾ ਦਿੱਤਾ ਹੋਇਆ ਨਾ ਆਸਰਾ ਉਹਦੇ ਨਾਲ ਜੋੜ ਦਿੰਦੇ ਰੂ ਜੇ ਅਸੀਂ ਕਹਿੰਨਾ ਮਾਇਆ ਦੇ ਆਸਰੇ ਜੀਵਨ ਹੈ ਸਾਡਾ ਬਣੀ ਜੀਰ ਦੇ ਆਸਰੇ ਕੇ ਉੱਠਣ ਆਸਰਾ ਉਹਦਾ ਢੇੜ ਵਾਲੇ ਦਾ ਮਾਇਆ ਤਾਂ ਸਾਰੀ ਉਹਦੀ ਹੈ ਹਾਂ ਸਾਰੀ ਉਹਨਾਂ ਦੇ ਵਿੱਚ ਆਏ ਹੋ ਜੀ ਉੱਚੀ ਉੱਚੀ ਨੂੰ ਉੱਚਾ ਥਾਂ ਅਗਮਾ ਭਾਰੀਆਂ ਜੇ ਕੋਈ ਕਿੱਡਾ ਵੀ ਉੱਚਾ ਹੋਵੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆ ਕੋਈ ਸ਼ਿਵੀਰ ਆ ਵੀ ਜਾ ਹੋਰ ਸ਼ਿਵ ਹੋਵੇ ਜਾਂ ਹੋਵੇ ਵੀ ਉੱਚਾ ਸਥਾਨ ਜਾਂਦਾ ਉੱਚੀ ਉੱਚਾ ਥਾਂ ਅਗਮਾ ਭਾਰੀਆਂ ਕਿ ਉੱਚਾ ਕਿ ਦਸ ਜਾ ਸਕਦਾ ਜਿੱਦਾ ਪਰਲਾ ਪਾਸਾ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ ਕਿਸੇ ਤਕਬਲ ਦੇ ਦਿੱਤੇ ਸਿਆ ਤੇਰੇ ਘਰ ਗੁਣੋਂ ਦੀ ਦੇ ਦੇ ਉਹਨੂੰ ਅਪਾਰਿਆ ਬੋਲੇ ਠੀਕ ਹੈ ਜੀ ਉੱਚੇ ਉੱਚਾ ਥਾਨ ਅਗਮ ਅਪਾਰਿਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਜੇ ਤਾਂ ਭਗਤ ਸੰਗ ਪਾਈਐ ਇਸ ਕਰਕੇ ਐਡੇ ਉੱਚੇ ਥਾਨ ਵਾਲੇ ਨੂੰ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਦਿਨ ਰਾਤ ਇੱਕ ਵਨ ਇੱਕ ਚਿਤ ਹੋ ਕੇ ਉਹਦਾ ਧਿਆਨ ਧਾਰ ਕੇ ਰੱਖਣਾ ਚਾਹੀਦਾ ਹੈ ਧਿਆਈਆ ਦਾ ਧਿਆਨ ਵਿੱਚ ਰੱਖਦੇ ਚਾਹੀਦਾ ਕਾਰ ਜੋੜ ਦਾ ਮਤਲਬ ਹੱਥ ਜੋੜ ਕੇ ਨਹੀਂ ਬਿਨ ਹੱਥ ਜੋੜ ਕੇ ਰੱਖੂਗਾ ਰੋਟੀ ਵੀ ਖਾਊਗਾ ਤਾ ਮਾਰਤਾ ਵਿਚਾਰ ਆ ਤੁਸੀਂ ਕਾਰ ਜੋੜ ਦਾ ਮਤਲਬ ਹੈ ਇੱਕ ਵਨ ਇੱਕ ਚਿਤ ਹੋ ਕੇ ਹੱਥ ਪਾੜ ਕਰ ਕਭ ਸਭ ਜੀਤ ਦੁਰਜੁਲਾ ਬਣਾਉਂ ਸਾਸ ਸਾਸ ਤੇ ਆਈਏ ਜਹ ਆਪੇ ਹੋਏ ਦਇਾਲ ਤਾਂ ਭਗਤ ਸੰਗ ਪਾਈਏ ਜਦੋਂ ਪਰਮੇਸ਼ਰ ਭਗਤ ਦੇਖੋ ਭਗਤ ਸੰਗ ਪਾਈਏ ਤਾਂ ਸੱਚ ਚ ਲੈ ਜਾਂਦਾ ਹੈ ਤਾਂ ਨਾਲ ਉਹ ਦਇਾਲ ਉਹ ਤਿਸਾਨ ਭਗਤ ਬਸੇ ਤੇ ਲੋ ਤਾਂ ਉਹ ਤੇ ਭਗਤਾਂ ਦੇ ਨਾਲ ਜਿਹੜੀ ਨੇ ਹੋਰ ਕੋਈ ਪਰਮੇਸ਼ਰ ਜੋ ਭਗਤਾਂ ਦੀ ਜੋ ਇੱਛਾ ਸ਼ਕਤੀ ਹੈ ਉਹ ਜੋ ਹੁਕਮ ਭਗਤਾਂ ਦੀ ਜੋ ਆਵਾਜ਼ ਹੈ ਸਾਰਿਆਂ ਦੀ ਇੱਛਾ ਸ਼ਕਤੀ ਦੀ ਇੱਛਾ ਸ਼ਕਤੀ ਨੂੰ ਭਗਤ ਸੰਦੇ ਉਹ ਉਦੇ ਅੱਗੇ ਪੰਕਤੀ ਦੀ ਵੀ ਪਾਰਲੀਮੈਂਟ ਦਾ ਹੁਕਮ ਸਾਰਿਆਂ ਤੇ ਲਾਗੂ ਹੁੰਦਾ। ਸਰਕਾਰੀ ਅਨੁਸੂਚੀ ਤੇ ਵੀ ਲਾਗੂ ਹੁੰਦਾ چاہے ਵਿਦੇਸ਼ ਦਾ ਵੀ। ਹਾਂਜੀ।